ਨੰਗੇ ਅੱਖਰ ਤੋਂ ਉਪਦੇਸ਼ ਹੈ ਜੀ ਹੋ ਜੀ ਇਹ 10ਵਾਂ ਅੱਖਰ ਹੈ ਜੀ ਤੇ ਜ਼ਿਆਦਾਤਰ ਅਖੀਰ 'ਚ ਲੱਗਦਾ ਏ ਦੀ ਬੜੀ ਘਟ ਵਰਤੋਂ जी ਅੱਜਕੱਲ ਦੀ ਪੰਜਾਬੀ ਵਿੱਚ ਹੂੰ ਤੇ जी ਕਬੀਰ ਜੀ ਵੱਲੋਂ 11ਵੀਂ ਫੌੜੀ ਦਾ ਉਪਦੇਸ਼ ਹੈ ਜੀ ਨੰਗਾ ਨਿਗਰਹ ਸਨੇਹ ਕਰ परम स्यानप एही हां मन निकरे त्रयो कट जिरवारो संदेह वो कहंदे शंका नू निवारण करो अपनी दूर कर दो दू। शंका ना रखो बुंदे विच ठीजी दी जे गुरते शब्दान दे पीछे लगांगे कोई नुक्सान नहीं हु नुक्सान नहीं होता है कोई ओदे पीछे लगे ते सोचते ते कोई बोटा फायदा नहीं है जो मिलना हुकुम ना मिलदे ਆਪਣੇ ਭਾਣੇ ਚੱਲੇ ਤੇ ਕੋਈ ਸਿਆਣੀ ਆਪਣੇ ਭਾਣੇ ਚੱਲਣ ਦੀ ਕੋਈ ਸ਼ਮਤਾ ਹੀ ਹੈ ਨਾਲ ਹੀ ਨਾ ਦੇਖਣਾ ਭਾਜੀ ਇਹ ਮੈਂ ਨਹੀਂ ਮੰਨਦਾ ਤਾਂ ਇਹ ਨੂੰ ਬਣਾਉਣਾ ਹੈ ਇਸ ਗੱਲ ਨੂੰ ਕਰ ਲਿਆਉਣਾ ਹੈ ਇਹ ਕੇ ਫੈਦ ਨਹੀਂ ਦੇ ਨਜ਼ਰ ਖਾਲਾ ਜਿਹੜਾ ਬਣ ਜਾਏ ਉਹ ਮਨ ਤਾਂ ਛੱਡੋ ਕਰੇ ਇਹ ਨੂੰ ਨਹੀਂ ਨਹੀਂ ਨਾਲ ਹੀ ਦੇਖਣਾ ਭਾਜੀ ਪਰਮ ਸਿਆਣਪ ਹੈ ਮਨ ਨਾਲ ਲੱਗੇ ਰਹਿਣੇ ਮਨ ਨਾਲ ਝਗੜਾ ਮਨ ਨਾਲ ਇਹ ਜਿੰਨਾ ਜਿਹੜਾ ਮੰਨਦਾ ਨਹੀਂ ਇਹਦੇ ਨਾਲ ਝਗੜਾ ਕਰਦਾ ਹੀ ਰਹਿਣੇ ਨੂੰ ਬਰੋੜ ਨਹੀਂ ਰਹਿਣੇ ਪਰ ਨਾਲ ਨਹੀਂ ਮੰਨਦਾ ਇਹ ਮਤਲਬ ਹੋਊਗਾ ਅੱਛਾ ਜੀ ਨਿਗਰਹਿ ਦਾ ਕੀ ਭਾਵ ਬਣਦਾ ਜੀ ਨਿਗਰਹਿ ਜਿਹੜਾ ਘਰੋਂ ਵਿਤਲਿਆ ਹੋਇਆ ਬਾਹਰ ਪਰਦੇਸੀ ਹੈ ਜਿਹੜਾ ਮਨ ਨੂੰ ਗਿਆ ਤੋ ਨਿਗਰਹਿ ਜਿਹੜਾ ਨਿਗਰਹਿ ਇਹਨੂੰ ਕਹਿ ਇਹਨੂੰ ਕਰ ਤੂੰ ਆਪਣੇ ਮੂਲ ਨਾਲ ਸਨੇ ਕਰ ਕਾਰਤਵਾਨੀ ਜਾਂਦਾ ਸਵੇਰੀ ਦਿਨ ਉਹਦੇ ਨਾਲ ਹੈ। ਪਾਪਪੁਰਖ ਦੋਨੋਂ ਭਾਈ ਭਾਈ ਹੈ ਤਾਂ ਦੋਨੋਂ ਭਾਈ ਇੱਕ ਪੁੰਨ ਹੈ ਪਾਪ ਹੈ। ਉਹਦੇ ਨਾਲ ਵਿਰੋਧ ਕਰਦਾ ਤਾਂ ਨਹੀਂ ਜਾਂਦਾ ਸਰ। ਹੁਕਮ ਦਾ ਵਿਰੋਧ ਕਰਦਾ। ਗੁਰ ਸ਼ਬਦਾਂ ਦਾ ਵਿਰੋਧ ਹੈ ਕਰਦਾ ਤਾਂ ਨਹੀਂ ਜਾਂਦਾ ਸਰ। ਤੇ ਜੇ ਉਹ ਲੇਖੇ ਨਾ ਹੀ ਨਾ ਭਜਿਏ। ਨਹੀਂ ਨੂੰ ਕਿ ਹਾਰੀ ਮੈਂ ਨਾ ਭਜਿਏ। ਮੰਨਦਾ ਤਾਂ ਤੂੰ ਖੜਾ ਵੀ ਹਿੱਲਣਾ ਹੈ। ਵਰੇ ਦਾ ਮਨ ਤੋਂ ਹਾਰ ਨਹੀਂ ਮੰਨਣੀ ਅਕਲ ਮੁਕੇ ਬੁੱਧੀ ਮੁਕੇ ਆ। ਅੱਛਾ ਜੀ ਪਰਮ ਸਿਆਣਪੇ। ਪਰਮ ਸਿਆਣਪ ਦੀ ਗੱਲ ਇਹ ਹੈ ਬਈ ਕਰ ਲੈ ਜਾ ਚਲੇ ਜਾਓ ਤੁਸੀਂ ਇਹ ਜੇ ਮਨ ਨਹੀਂ ਮੰਨਦਾ ਤਾਂ ਮਾਨੂੰ ਬਲੋੜੋ ਤੇਰਾ ਕੰਮ। ਪਰ ਕੇ ਗੁੱਜੀ ਅਗਲੀ ਪਾਈਏ ਬਾਣ ਇਹ ਕੰਦਾ ਹੀ ਖਬਰ ਸਾਰਾ। ਠੀਕ ਹੈ ਜੀ। ਹੁਣ ਜੀ ਆਸਾ ਮਹੱਲਾ ਪਹਿਲਾ ਪੱਟੀ ਨੰਘੈ ਗਿਆਨ 부ਝੈ ਜੇ ਕੋਈ ਪੜਿਆ ਪੰਡਿਤ ਸੋਈ ਬੁੱਝੇ ਜੇ ਕੋਈ ਪਰ ਗਿਆਨ ਬੁੱਝਣ ਵਾਲਾ ਉਹ ਪੜਿਆ ਜਿਹੜਾ ਹੈ ਪੰਡਿਤ ਉਹੀ ਹੈ ਜਿਹੜਾ ਗਿਆਨ ਬੁੱਝੇ ਜਿਹੜਾ ਸਰਫੇ ਤੇਖਰੀ ਅਰਥ ਕਰੇ ਬੁੱਝੇ ਨਾ ਵਿੱਚੋਂ ਗੱਲ ਭੇਦ ਨਾ ਬੁੱਝੇ ਸ਼ਬਦ ਭੇਦ ਨਾ ਜਾਣੇ ਸ਼ਬਦ ਜਿਹੜੇ ਕਹੇ ਨੇ ਜਿਹੜੀ ਗੱਲ ਕਹੀ ਉਹਦੇ ਕੋ ਭੇਦ ਦੀ ਗੱਲ ਹੈ ਅੱਛਾ ਜਿੰਨਾਂ ਗਿਆਨ ਬੁੱਝੇ ਜੇ ਕੋਈ ਪੜਿਆ ਪੰਡਿਤ ਸੋਈ ਵੜੇ ਪੰਨੇ ਤੋਹੀ ਹੈ ਜੇ ਗਿਆਨ ਜੋ ਲਿਖਿਆ ਹੋਇਆ ਖਾਂਜੋ ਨੂੰ ਗੁੱਝੇ ਸਮਝੇ ਗੁਰਮਤੋਂ ਨੂੰ ਪੰਡਤ ਮੰਨਦੀਆਂ ਜੀ ہاں ਗੁਰਮਤੋਂ ਪੰਡਤ ਨਹੀਂ ਬਦੂਗੀ ਜੇ ਬੁੱਝੂਗਾ ਠੀਕ ਹੈ ਜੀ ਸਰਬ ਜੀਆਂ ਮੈਂ ਏਕੋ ਜਾਣੈ ਤਾਂ ਹਉਮੈ ਕਹੈ ਨਾ ਕੋਈ ਸਰਬ ਜੀਆਂ ਦੇ ਵਿੱਚ ਜੇ ਜੋ ਜਾਣੈ ਤਾਂ ਫਿਰ ਮੈਂ ਵੱਡਾ ਮੈਂ ਪੰਡਤਾਂ ਇਹ ਘਟੀ ਇਹ ਧੀਚ ਹੈ ਊਚ ਹੈ ਫਿਰ ਹਉਮੈ ਆਲੀ ਗੱਲ ਤਾਂ ਦੇ ਕੋਈ ਕਹਿੰਦਾ ਮੈਂ ਖਤਰੀ ਆ ਅਸੀਂ ਬੜੀ ਕੋਲ ਵਾਲੇ ਉੱਚੀ ਕੋਲ ਵਾਲੇ ਆ ਕੋਈ ਕਹੂਗਾ ਕੋਈ ਹੋਂਗੇ ਨਾ ਕੋਈ আচ্ছা ਕਹਿੰਦਾ ਪਾਪਾ ਜੀ ਉਹ ਚਾਰ ਵਰਨ ਫਿਰ ਖਤਮ ਹੋ ਜਾਣਗੇ ਹਾਂ ਜੀ ਹਾਂ ਫਿਰ ਆਪਣੇ ਆਪ ਨੂੰ ਸ੍ਰੇਸ਼ਟੀ ਬਣੂਗਾ ਕੋਈ ਠੀਕ ਹੈ ਜੀ ਇਹ ਚੌਥੀ ਪੌੜੀ ਦਾ ਉਪਦੇਸ਼ ਸੀਗਾ ਜੀ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਆਸਾ ਮਹੱਲਾ ਤੀਜਾ ਪੱਟੀ ਵਿੱਚ ਨੰਗੇ ਤੋਂ ਕੋਈ ਉਪਦੇਸ਼ ਨਹੀਂ ਹੈ ਜੀ ਬਾਵਨ ਅਖਰੀ ਜੋ ਉਪਦੇਸ਼ ਦਿੰਨੇ ਜੀ ਪੌੜੀ ਪਹਿਲਾ ਹੈਗਾ ਜੀ ਪੰਜਵੀਂ ਪੌੜੀ ਚ ਦਿੱਤਾ ਇਹ ਜੀ ਗਿਆਨ ਪੌੜੀ ਨੰਗਾ ਗਿਆਨ ਨਹੀਂ ਮੁਖ ਬਾਤੋਂ ਅਨੇਕ ਜੁਗਤ ਸਾਸ਼ਤਰ ਕਰ ਬਾਤੋਂ ਗੱਲਾਂ ਨਹੀਂ ਉਹ ਕਥਾ ਰੱਖੀਏ ਕੋਈ ਕਥਾ ਤਰਤੀਬ ਆ ਰੂਪਿਓ ਜ ਗਿਆਨ ਹੁੰਦਾ ਗੱਲਾਂ ਚ ਗਿਆਨ ਨਹੀਂ ਹੁੰਦਾ ਕੋਈ ਇੱਧਰਲੀ ਮਾਰਦੀ ਉੱਧਰ ਉਹ ਉੱਧਰਲੀ ਮਾਰਦੀ ਦੂਹ ਪਰ ਦੂਹ ਉਹ ਜੀ ਕੀ ਗਿਆਨ ਦੀ ਗੱਲ ਜੀ ਹੁੰਦਾ ਗਿਆ ਇਹ ਜਿਹੜੀਆਂ ਗੱਲਾਂ ਨੇ ਉਹ ਚ ਗਿਆਨ ਨਹੀਂ ਮੁੱਖ ਬਾਤਾਂ ਜਿਹੜੀ ਮੁੱਖ ਜੋ ਨਹੀਂ ਲੱਈ ਹੋਈ ਹੈ ਬਾਹਰੋਂ ਬਾਹਰ ਉਹ ਚ ਗਿਆਨ ਨਹੀਂ ਹੁੰਦਾ ਅੰਦਰੋਂ ਆਈ ਹੋਈ ਹੈ ਅਨੇਕ ਜੁਗਤੀ ਸਾਸਤਰ ਕਰਪਾਤੋਂ ਪਰਿਪੰਪਈ ਭਾਂਤ ਨਾਲ ਗਿਆਨ ਕਰਾਇਆ ਹੈ। ਛਾਤਰਾਂ ਨੇ ਵੀ ਉਹ ਕੋਈ ਕਹਾਣੀ ਸਾਖੀ ਲਿਆਉਂਦੇ ਨੇ ਤਾਂ ਕੋਈ ਗਿਆਨ ਹੁੰਦਾ ਹੈ। ਕਾਚਨ ਜੋਗ ਨਾ ਹੋ ਹਾ ਗਿਆਨੀ ਹੋਈ ਹੈ ਜਿਹਦੇ ਸੂਦਰ ਜੀ ਤੋਂ ਇਹਦਾ ਜਿਹੜਾ ਮੂਲ ਹੈ ਜਿਹੜਾ ਅੱਖਰ ਤੋਂ ਪਰੇ ਹੈ ਦੇਖਣ ਤੋਂ ਪਰੇ ਹੈ ਮਨ ਬੁੱਧੀ ਤੋਂ ਪਰੇ ਹੈ ਉਹ ਜਿਹਨੂੰ ਜਿਹੜਾ ਹੋ ਗਿਆ ਗਿਆਨ ਤਾਂ ਉਹਦਾ ਹੀ ਚਾਹੀਦਾ ਜਿਹੜਾ ਸਾਡੇ ਗਿਆਨ ਦੇ ਤੋਂ ਪਰੇ ਦਾ ਜਿਹੜਾ ਗਿਆਨਿੰਦਰਾ ਦੇ ਪਰੇ ਉਹਦਾ ਗਿਆਨ ਹੋਵੇ ਉਹ ਗਿਆਨੀ ਆ ਦੂਜੇ ਤਾਂ ਗਿਆਨੀ ਥੋੜੀ ਨੇ ਦੂਜੇ ਗਿਆਨੀ ਨਹੀਂ ਉਹਦੇ ਦੇ ਗਿਆਨ ਸਾਰੇ ਕੋਲੇ ਹੀ ਆ ਠੀਕ ਹੈ ਜੀ ਕਹਿਤ ਸੁਨਤ ਕਛ ਜੋਗ ਨਾ ਹੋ ਨਾਲ ਗੱਲਾਂ ਨਾਲ ਜੋਗ ਨਹੀਂ ਹੁੰਦਾ ਜੋਗ ਜੋਗ ਕਹਿਣ ਨਾਲ ਜੋਗ ਨਹੀਂ ਹੁੰਦਾ ਜੋਗ ਜਦ ਹੋ ਜੀ ਤਾਂ ਜੋਗ ਕਰਨਾ ਉਹਨੂੰ ਜਾਣਦਾ ਹੋਵੇ ਉਹ ਜਾਨ ਲਵੇ ਉਹਨੂੰ ਸਮਝ ਲਵੇ ਜੇ ਰੋਦਰ ਨਾਲ ਜੁੜੂਗਾ ਇਹ ਉਹਨੂੰ ਜਾਣਦਾ ਹੀ ਨਹੀਂ ਜਿਹਦੇ ਨਾਲ ਜੁੜ ਤੇ ਜੁੜ ਕੀ ਲੈ ਜਾਊਗਾ ਦੱਲਾ ਕਰਦੇ ਨੇ ਜੁੜਉਂਦੀਆਂ ਹਵਾ 'ਚ ਅਕਾਸ਼ ਦੇ ਵਿੱਚੇ ਹਵਾ ਦੇ ਵਿੱਚ ਥੁਰਤੀ ਦਿਖਾਉਂਦੇ ਨੇ ਜੀ ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ ਉਸਨ ਸੀਤ ਸੰਸਰ ਸਭ ਕਹਿ ਗਿਆਨੀ ਹੋ ਰਹੇਗਾ ਜਿਹੜਾ ਆਗਿਆ ਜਿਦੜੇ ਜਿਹੜਾ ਹੁਕਮ ਚੱਲੇ ਭਾਲੇ ਚੱਲੇ ਉਸਨਸੀਤ ਸੰਸਰ ਸਾਕੇ ਉਹ ਫਿਰ ਗਰਮੀ ਸਰਦੀ ਉਹਨੂੰ ਬਰਾਬਰ ਹੀ ਹੈ ਦੁੱਖ ਸੁੱਖ ਉਹਦੇ ਵਾਸਤੇ ਕੋਈ ਨਹੀਂ ਹੈ ਠੀਕ ਹੈ ਜੀ ਗਿਆਨੀ ਤਤ ਗੁਰਮੁਖੀ ਵਿਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਹਾਂ ਗੁਰਮੁਖਾਂ ਨੇ ਜਿਹੜਾ ਤਤ ਹੈ ਗਿਆਨ ਨਾਮ ਦਾ ਤੱਤ ਵਿਚਾਰਿਆ ਉਹ ਗੁਰਮ ਉਹ ਗੁਰਮਖ ਨੇ ਵਿਚਾਰਿਆ ਜੀ ਇਹਦੇ ਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ਕਿਰਪਾ ਧਾਰੀ ਉਹ ਤੱਤ ਵਿਚਾਰ ਹਾਲਾਤ ਇਹ ਜਿਹੇ ਉਹਦੇ ਅਨੁਕੂਲੇ ਬਣਾ ਕੇ ਰੱਖੇ ਨੇ ਵਿਚਾਰਨਾ ਤੁਹਾਨੂੰ ਇਹ ਕਹਿੰਦਾ ਪਰ ਉਹ ਹਾਲਾਤ ਫਿਰ ਵੀ ਉਹਦੇ ਉਹ ਜਿਹੇ ਅਨੁਕੂਲ ਬਣਾ ਕੇ ਰੱਖਦਾ ਠੀਕ ਹੈ ਜੀ ਹਾਂ 16ਵੀਂ ਪੌੜੀ 'ਚ ਵੀ ਉਪਦੇਸ਼ ਹੈ ਜੀ नंगा खट शास्त्र होए ज्ञाता पूरक कुंभक रेचक कर्मत्ता हां नुन्ना चले छे शास्त्रनदा पढेया और रेचक कुंभक ओ जेडे है करदा होवे सा खचे लिया फिर रोक लिया फिर छोड़ देता भी करदा होवे ज्ञान ध्यान तीर्थ स्नाननी सोम पाक अपर्ष उदयानी ਕਾਂਜਾ ਸ਼ਾਸਤ੍ਰਾਂ ਦਾ ਸਾਰਾ ਗਿਆਨ ਰੱਖਦਾ ਹੋਵੇ। ਉਹ ਧਿਆਨ ਵੀ ਸ਼ਾਸਤ੍ਰਾਂ ਮੁਤਾਬਕ ਲਾਉਂਦਾ ਹੋਵੇ ਜਿਵੇਂ ਸ਼ਾਸਤ੍ਰਾਂ ਦੇ ਲਿਖਿਆ ਹੋਇਆ। ਉਹ ਵੀ ਧਿਆਨ ਧਾਰਦਾ ਹੋਵੇ ਉਹਦਾ ਜੀਵ ਜਿਵੇਂ ਸ਼ਾਸਤ੍ਰਾਂ ਵਿੱਚ ਦੱਸਿਆ ਹੋਇਆ। ਤੇ ਅਪਰਥ ਹੋਵੇ ਦੂਏ ਦਾ ਹੱਥ ਵੀ ਲਾਉਣ ਦਿੰਦਾ ਰੋਟੀ ਨੂੰ ਜੇ ਜੀ ਨੂੰ ਹੱਥ ਲਾ ਕੇ ਖਾਣ ਦੀ ਕੱਪੜਿਆਂ ਨੂੰ ਹੱਥ ਨਹੀਂ ਲਾਉਣਾ ਧੋਲੇ ਪਾਣੇ 'ਚ ਰਹਿਣ ਵਾਲਾ ਹੋਵੇ ਹੋਵੇ ਜੰਗਲ 'ਚ ਰਹੇ ਪਿੰਡਾਂ 'ਚ ਨਾ ਰਹੇ ਸ਼ਹਿਰਾਂ 'ਚ ਨਾ ਰਹੇ ਜਾਵੇ ਹਾਂਜੀ ਰਾਮ ਨਾਮ ਸੰਗੀ ਮਨ ਨਹੀਂ 헤ਤਾ ਜੋ ਕੱਛੂ ਕੀਨੋ ਸੋਉ ਅਨੇਤਾ ਕੋਨ RAM ਨਾਮ ਦੇ ਨਾਲ ਤਾਂ ਸੰਦੇ ਦਾ ਜੁੜਿਆ ਨਹੀਂ ਕੋਈ ਨੇ ਬੇਡ ਵਿਚਾਰ ਨਹੀਂ ਕੀਤਾ ਇਸਮਰਤਿ ਜਾਸਤਰ ਪੜਦਾ ਰਿਹਾ ਤਾਂ ਜਿਹੜਾ ਕੁਝ ਕੀਤਾ ਸਾਰਾ ਫਜ਼ੂਲ ਹੀ ਕੀਤਾ ਇਹਦਾ ਕੋਈ ਲਾਭ ਨਹੀਂ ਹੋਣਾ ਉਹਨੂੰ ਨਾਲ ਜਾਣ ਵਾਲੀ ਕੋਈ ਚੀਜ਼ ਨਹੀਂ ਇਸਮਰਤਿ ਜਾਸਤਰ ਦੇ ਵਿੱਚ ਪੁੰਨ ਪਾਉ ਬਚਾਰਿਆ ਛੱਟ ਗਿਆ ਉਹ ਤੇ ਤੱਤ ਗਿਆ ਨਹੀਂ ਲਿਆ ਨਹੀਂ ਇਸਮਰਤਿ ਜਾਸਤਰ ਕੋਨ ਪਾਉ ਸਾਲ ਲਿ ਜਾਣੀ ਤੱਤ ਨਹੀਂ ਸਾਰੇ ਨਹੀਂ ਉੱਥੇ ਸਾਰੇ ਹੀ ਕੀਤਾ ਫਜ਼ੂਲ ਗਿਆ ਨਾਮ ਤੋਂ ਸਖੜਾ ਰਹੇ ਜੀ ਅੱਛਾ ਜੋ ਕੁਛ ਕੀਨੋ ਸੋ ਉਹ ਨੇਤਾ ਜਿਹੜੀਆਂ ਕਿਰਿਆਵਾਂ ਕੀਤੀਆਂ ਇਹਨਾਂ ਦਾ ਕੋਈ ਫਲ ਨਹੀਂ ਹੈ ਜੀ ਫਲ ਨਹੀਂ ਵਜੂਲ ਚਲੇ ਜਾਂਦੀਆਂ ਨਾਮ ਤੋਂ ਬਿਨਾ ਇੱਕ ਵਰਕੇ ਠੀਕ ਹੈ ਜੀ ਤੇ ਉਤਮ ਘਣੋ ਚੰਡਾਲਾ ਨਾਨਕ ਜਿਹੇ ਮਨ ਬਸੇ ਗੋਪਾਲਾ ਹੁਣ ਐਡਾ ਬਣਾ ਆਪਣੇ ਆਪ ਨੂੰ ਸਪਾਰਸ਼ੀ ਕਰਦਾ ਆਪੇ ਪਕਾ ਕੇ ਖਾਂਦਾ ਔਰ ਰੇਜ ਕਪੂਰ ਕੁੰਭਕ ਵੀ ਕਰਦਾ ਚਰਿਆਵਾਂ ਤੇ ਉਹਦੇ ਤਾਂ ਜਿਹੜਾ ਚਨਾਲ ਜਿਹਨੂੰ ਕਹਿੰਦਾ ਹੈ ਉਹ ਤਦ ਚਨਾਲ ਕਹਿੰਸੀ ਜਿਵੇਂ ਸਾਡੇ ਕੋਲ ਸਦਨ ਕਹਿੰਦੇ ਨੇ ਉਹ ਚਨਾਲ ਉਤਮ ਹੈ ਪਰ ਬਸ਼ਰਤੇ ਕਿ ਉਹ ਚਨਾਲ ਦੇ ਵਿੱਚ ਗੋਪਾਲ ਵਸਦਾ ਹੋਵੇ ਜਾ ਕੇ ਗੋਪਾਲਾ ਉਹ ਚਨਾਲ ਉਹਦੇ ਨੂੰ ਚੰਗਾ ਨਾਨਕ ਜਹ ਮਨ ਵਸੇ ਗੋਪਾਲਾ ਕਾਂ ਬਸੇ ਗੋਪਾਲ ਨਾਲ ਰਣਕਾ ਕਹਿੰਦਾ ਜੀ ਜਿਹਦੇ ਮਨ ਚ ਜੇ ਬਸਦਾ ਹੋਵੇ ਨਾ ਗੋਪਾਲ ਉਹ ਚੜ ਨਾਲ ਚੰਗੇ ਰੋ ਅੱਛਾ ਜੀ ਗੁਰਮਤ ਫਿਰ ਬਾਹਰਲੇ ਕਰਮਕਾਂਡ ਨੂੰ ਬਿਲਕੁਲ ਵੀ ਉਹਨੇ ਦਿੰਦੀ ਤਾਂ ਆਪਣੇ ਬਣਾਏ ਹੋਏ ਨੇ ਇਹ ਤਾਂ ਸੱਚ ਦੀ ਗੱਲ ਹੈ ਉੱਥੇ ਕੀ ਪ੍ਰਮਾਣ ਹੈ ਕਹੋ ਭਗਤੀ ਪ੍ਰਮਾਣ ਹੈ ਇਹ ਇਹ ਉੱਥੇ ਹੈ ਭਗਤੀ ਉਹਦੀ ਪ੍ਰਵਾਣ ਠੀਕ ਹੈ ਉਹ ਆਪਣੇ ਆਪ ਚ ਦੁਨੀਆਂ ਚ ਯੋਗ ਮਤ ਚ ਸਭ ਤੋਂ ਉੱਤਮ ਬਣਿਆ ਹੋਇਆ ਆਪਣੇ ਆਪ ਚ ਬਣੇ ਹੋਏ ਨੇ ਆਪਣੇ ਆਪ ਨੂੰ ਕੌਣ ਆਪਣੇ ਆਪ ਕੋਈ ਰਾਜਾ ਬਣਨਾ ਫਿਰ ਫਿਰ ਜਾਵੇ ਗੁਰਮਤੋਂ ਨੂੰ ਚੰਡਾਲ ਤੋਂ ਵੀ ਥੱਲੇ ਸਮਝਦੇ ਹਾਂ ਜੀ ਹਾਂ ਉਹ ਚੰਗਾ ਹਰਦੂ ਠੀਕ ਹੈ ਪਰ ਸ਼ਰਤ ਹੈ ਵੀ ਉਹਦੇ ਮਨ ਵਿੱਚ ਗੋਪਾਲ ਵਸਦਾ ਹੋਵੇ ਗੋਪਾਲ ਚੰਨਾਲ ਖਾ ਨੂੰ ਕੋਈ ਜਿਹਦੇ ਵਸਦਾ ਇਹ ਕਹਿੰਦੇ ਨੇ ਚੰਨਾਲ ਤਾਂ ਕਿਰਤ ਨੂੰ ਇਹ ਧਰਮ ਬਣਾ ਲੈਣੇ ਜੀ ਦਖਾਵੇ ਦਾ ਦਖਾਵੇ ਦਾ ਧਰਮ ਇਹ ਗੱਲ ਹੈ ਕਿ ਕਿਰਤ ਤੋਂ ਦਿਖਾਵਾ ਹੁੰਦੀ ਹੈ ਦਿਖਾਵੇ ਦਾ ਧਰਮ ਸ਼ੁਰੂ થઈ ਦਿਖਾਵੇ ਦੇ ਧਰਮ ਠੀਕ ਹੈ ਕਿਰਤ ਨੂੰ ਧਰਮ ਨਹੀਂ ਮੰਨਦੇ ਕਿਰਤ ਨੂੰ ਧਰਮ ਮੰਨਦੇ ਆਹ ਹਾਂ ਕੀਰਤੀ ਕਾ ਧਰਮ ਠੀਕ ਹੈ ਜੀ ਹੁਣ 21ਵੀਂ ਪੌੜੀ 'ਚ ਵੀ ਉਪਦੇਸ਼ ਹੈਗਾ ਜੀ ਨੰਗੇ ਅੱਖਰ ਦਾ ਪੌੜੀ ਨੰਗਾ ਗ੍ਰਾਸੈ ਕਾਰਤਹਿ ਜੋ ਸਾਖਤ ਪ੍ਰਭ ਕੀਨ ਅਨੇਕ ਜੋਨ ਜਨਮੇ ਮਰੈ ਆਤਮ ਰਾਮ ਨਾ ਚੀਨ ਕਾਲ ਨੇ ਇੱਕ ਤੈਨੂੰ ਇੱਕੋ ਹੀ ਬੁਰਕੀ ਕਰਦੀਆਂ ਇੱਕੋ ਗਰਾਸ ਨੇ ਕਾਲ ਦਾ ਜਿਹੜੇ ਸਾਖਤ ਹੋਗੇ ਤੇ ਹੋ ਕੇ ਵੀ ਛੱਡਿਆ ਤੂੰ ਸਾਖਤ ਤਾਂ ਬਹੁਤ ਜਿਆਦਾ ਅਫਰਾਦੀ ਹੁੰਦਾ ਦੁਨੀਆ ਨੂੰ ਆਪਣੀ ਯਾਦ ਨੂੰ ਫਸਾਈ ਜਾਂਦਾ ਨਮਲੇ ਜਾਲ ਚ ਉਹਦੇ ਨਾਲ ਅਸਲੀ ਉਹੀ ਹੁੰਦਾ ਨੂੰਨਾ ਗ라스ੇ ਕਾਲ ਜੋ ਸਾਖਤ ਪ੍ਰਭ ਕੀ ਜਿਹੜੇ ਸਾਖਤੇ ਨੇ ਉਹਨਾਂ ਨੂੰ ਕਾਲ ਦੀ ਜ਼ਰਤ ਹੋਏ ਨੇ ਗਰਖ ਲੈਣਾ ਕਾਲ ਦਾ ਗ라스ੇ ਨੇ ਉਹ ਹਾਂਜੀ ਅਨੇਕ ਜੋਨੀ ਜਨਮੇ ਮਰੇ ਆਤਮ ਰਾਮ ਨਾ ਚੀਨ ਆਤਮ ਰਾਮ ਨੂੰ ਚੀਰਦੇ ਨਹੀਂ ਆਪਣੇ ਮੂਲ ਨੂੰ ਚੀਰਦੇ ਨਹੀਂ ਆਤਮ ਦਾ ਜੋ ਰੱਬ ਹੈ ਅੰਦਰ ਹੈ ਉਹ ਆਪਣਾ ਪੜਾ ਰੰਗ ਨਹੀਂ ਸਕਦਾ ਸਭੇ ਘਟ ਰਾਮ ਉਹ ਜਿੰਨਾ ਜੇ ਰਾਤ ਬਨਾਵਲੀ ਚੀਜ਼ ਲੈਂਦੇ ਖੋਜ ਲੈਂਦੇ ਆਪਣੇ ਅੰਦਰ ਉਹ ਰਾਮ ਨੂੰ ਖੋਜ ਨਹੀਂ ਲੈਂਦੇ ਉਹਨਾਂ ਚੰਨ ਜੰਮਣ ਬੰਦ ਤੋਸ਼ ਸ਼ਕਾਰਾ ਨਹੀਂ ਹੋਣਾ ਕਿਸੇ ਦਾ ਵੀ ਜਿਹੜੀ ਸਾਡੀ ਆਤਮਾ ਜਿਹੜਾ ਆਤਮ ਹੈ ਆਪਣਾ ਉਹਦਾ ਜਿਹੜਾ ਬੂੜਾ ਉਹ ਰਾਮ ਹੈ ਸਭਾ ਕਾਠ ਰਾਮ ਬੋਲੇ ਆਤਮੰਦ ਲਖ ਜਹਸਨ ਦੇ ਵਿੱਚ ਨਫਜ਼ ਆਤਮਾ ਨਾ ਆਤਮਾ ਦਾ ਬਾਦ ਵਿੱਚ ਬੜੇ ਹਸਤਿਕਰੇ ਆਏ ਸਾਰੇ ਆਤਮ ਨੂੰ ਬੋਲਦੇ ਨੇ ਜਿੱਦੀ ਵਾਲੇ ਮਨ ਨੂੰ ਆਤਮ ਨੂੰ ਕਹਿੰਦੇ ਨੇ ਜਿਹੜਾ ਮਾਇਆ ਚ ਆਇਆ ਹੋਇਆ ਅੱਛਾ ਇਹਦਾ ਜਿਹੜਾ ਮੂਲ ਹੈ ਉਹ ਰਾਮ ਹੈ ਹਾਂ ਉਹਦੇ ਅੰਦਰ ਰਾਮ ਬੋਲਦਾ ਠੀਕ ਹੈ ਜੀ ਉਹਨੂੰ ਆਤਮ ਰਾਮ ਆਤਮਾ ਦਾ ਰਾਮ ਆਤਮ ਰਾਮ ਆਤਮ ਵੀ ਉਹ ਆਪੇ ਰਾਮ ਵੀ ਉਹ ਆਖਿਆ ਸੰਦੇਵ ਠੀਕ ਹੈ ਜੀ ਗਿਆਨ ਧਿਆਨ ਤਾਹੂ ਕੋ ਆਏ ਕਰੇ ਕਿਰਪਾ ਜਿਹੇ ਆਪ ਦਿਵਾਏ ਗਿਆਨ ਧਿਆਨ ਤਾਹੂ ਕੋ ਆਏ ਗਿਆਨ ਤੇ ਮਿਉ ਨੂੰ ਮਿਲਦਾ ਧਿਆਨ ਵੀ ਉਹਦਾ ਜੁੜਦਾ ਉਹਨੂੰ ਸਮਝ ਆਉਂਦੀ ਹੈ ਗਿਆਨ ਧਿਆਨ ਦੀ ਕਿਹੜਾ ਗਿਆਨ ਹੈ ਕਿਵੇਂ ਧਿਆਨ ਲਾਉਣਾ ਹੈ ਕਰੀ ਕਿਰਪਾ ਜੇ ਦੋ ਆਏ ਜੇ ਉਹ ਕਿਰਪਾ ਕਰਕੇ ਆਪ ਸੋਝੀ ਦਵਾ ਦਿੰਦਾ ਉਹਨੂੰ ਸਮਝ ਆਉਂਦੀ ਹੈ ਗਿਆਨ ਧਿਆਨ ਦੀ ਗਣਤੀ ਗਣੀ ਨਹੀਂ ਕੋਉ ਕਾਚੀ ਗਾਗਰ ਸਰ ਗਣਤੀ ਗਣੀ ਜਿਹੜੀ ਪੁਰ ਪਾਪ ਦੀ ਗਿਲਤੀ ਹੈ ਨਾ ਇਹਦਾ ਨਹੀਂ ਛੜਕਾਰਾ ਕਿਸੇ ਦਾ ਵੀ ਹੁੰਦਾ ਜਿਹੜਾ ਲੇਖਾ ਇਹਦੇ ਨਾਲ ਛੜਕਾਰਾ ਨਹੀਂ ਹੁੰਦਾ ਗਣਤੀ ਗਣੀ ਨਾਲ ਕੋਉਂ ਝੂਟਾ ਕਾਤੀ ਗਾਦਰ ਸਰਪਰ ਫੁੱਟਾ ਜਿਹੜੀ ਕਾਤੀ ਕਾਗਰ ਹੈ ਨਾ ਸਰੀਰ ਵਾਲਾ ਇਹਦਾ ਫਟਣਾ ਨਿਸ਼ਚਿਤ ਹੈ ਇਹਦੀ ਬੈਠਣ ਕਿਸੇ ਦਾ ਵੀ ਇਹ ਤਾਂ ਫਟਣਾ ਫਟਣਾ ਹੀ ਹੈ ਸਭ ਦਾ ਇਹਦਾ ਕੋਈ ਉਪਾਅ ਕਰਨ ਦਾ ਕੋਈ ਫਾਇਦਾ ਨਹੀਂ ਉਪਾਅ ਕਰਨਾ ਆਪਣਾ ਮੂਰ ਜਿਹੜਾ ਹੈਗਾ ਉਹਨੂੰ ਟੋੜ ਖੋਜ ਲਓ ਅੰਦਰੋਂ ਠੀਕ ਹੈ ਉਹ ਨਾਲ ਜੋ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਜੀਵਤ ਹੋ ਰਹੂਗਾ ਜਿਉਂਦਾ ਹੋ ਰਹੂਗਾ ਜਪਿਆ ਸਤਗੁਰ ਜਾਗਤਾ ਹੈ ਦਿਓ ਭੋਲੀ ਮਾਲਣੀ ਆਇਓ ਓਏ ਅੰਦਰ ਹੈ ਜੜਾ ਇਹਦਾ ਮੂਲ ਉਹ ਜੀਵਤ ਹੈ ਉਹ ਜਿਉਂਦਾ ਹੀ ਆ ਜਾਦੇ ਜਾਂਦਾ ਨਾ ਅੱਗੇ ਹੰਸਾ ਥੇਲਾ ਅਕੇਲਾ ਹੀ ਹੁੰਦਾ ਇਕੱਲਾ ਹੀ ਜਾਂਦਾ ਕੋਈ ਇਹ ਉਹਦੇ ਵਿੱਚ ਸਮਾ ਜਾਂਦਾ ਜਿਹਨੇ ਉਹਨੂੰ ਜਿਉਂਦੇ ਜਿਉਂਦੇ ਜਪ ਲਿਆ ਉਹ ਜਿਉਂਦਾ ਹੀ ਰਹਿੰਦਾ ਕੋਈ ਜੀਵ ਤੋਂ ਜੀਵਕ ਜਪਿਆ ਉਹ ਜਿਉਂਦਾ ਰਹਿੰਦਾ ਉਹ ਨਹੀਂ ਮਰਦਾ ਜਿਹਨੇ ਜੀਵਕ ਜਪਿਆ ਜੈਸਾ ਸਵੇ ਹੋਏ ਪ੍ਰਗਟ ਪਏ ਨਾਨਕ ਨਾ ਛਪਿਆ ਆ ਉਹ ਕਹਿੰਦੇ ਉਹਦਾ ਉਹ ਨਹੀਂ ਛਪਿਆ ਉਹ ਉਹ ਛਪਣਾ ਉਹ ਕੀ ਆ ਉਹ ਦੱਸ ਗਿਆ ਸਾਰੇ ਇਹ ਤਾਂ ਖੋਲ ਗਿਆ ਉਹ ਸਾਰੇ ਸਾਰੇ ਆਪਸਾਂ ਨੇ ਭੇਦ ਖੋਲਿਆ ਦੀ ਉਹ ਦੀ ਛਪਿਆ ਉਹ ਪ੍ਰਗਟ ਹੋ ਜਾਂਦਾ ਉਹ ਪਹਿਲਾਂ ਹੀ ਪ੍ਰਗਟ ਜੀਵਨ ਦੇ ਵਿੱਚ ਹੀ ਪ੍ਰਗਟ ਹੋ ਜਾਂਦਾ ਠੀਕ ਹੈ ਜੀ ਇੱਥੇ ਨੰਗੇ ਅੱਖਰ ਦਾ ਜਿਹੜਾ ਗਿਆਨ ਹੈਗਾ ਚਾਰੇ ਬਾਣੀਆਂ ਦਾ ਸਮਾਪਤਾ ਹੈ 21ਵੀਂ ਪੌੜੀ ਦਾ ਉਪਦੇਸ਼ ਸੀ ਜੀ ਤੇ ਜੇ ਆਪਾਂ ਇਹਨੂੰ ਸਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਗਿਆਨ 부ਝਣ ਦੀ ਗੱਲ ਹੈ ਜੀ ਜਿਹੜੇ ਨੇ 부ਝ ਲਿਆ ਹੀ ਪੇਧ ਠੀਕ ਹੈ ਦੇ ਜਿਹਾ ਜਿਹਾ ਇਹੀ ਲਿਖਿਆ ਹੈ ਠੀਕ ਹੈ ਪੰਡਤ ਨੂੰ ਵੀ ਉਪਦੇਸ਼ ਹੈ ਜੀ ਨੰਗੇ ਗਿਆਨ 부ਝੇ ਜੇ ਕੋਈ ਫੜਿਆ ਪੰਡਤ ਤੇ ਉਧਰ ਜੋਗੀ ਨੂੰ ਵੀ ਹੈ ਕਿ ਉਹ ਤੋਂ ਤੇ ਉੱਤਮ ਗਣੋ ਚੰਡਾਲਾ ਗਿਆਨ ਦੀ ਹੀ ਗੱਲ ਪਰ ਜੋਰ ਹੈ ਜੀ ਹੈ ਵੀ ਅੱਖਰ ਵੀ ਗੱਗੇ ਤੋਂ ਹੀ ਸਮਝੋ ਇਹ हां जी ज्ञान तो सकड़ा तन्नू तर मन आई नहीं गुरबानी दे ठीक है जी